असतु संत संगी अंतर प्रभु देखा नाम परो का लागा बे संत संगी जद संत दी संगत कर ली ना अंतर आत्मा नाल जुड़ के चलया जद अंतर आत्मा नाल जुड़ के जद जीवन भौतिक कराण लागया उदी संगत नहीं छड़ी जो अंतर आत्मा कह थी ओही गल मनदा गया अंतर प्रभु डीठा प्रभु अंदर ही देख लिया ਪ੍ਰਭ ਕਮੇ ਦੇਖਿਆ ਅਦ੍ਰਤੀ ਤਸਰ ਅੰਤਰਾਤਮਾ ਨੇ ਜਿਹੜਾ ਸੰਗਤ ਕਰਦਾ ਉਹ ਹੀ ਕੋਲ ਪ੍ਰਭ ਆਪੇ ਹੋ ਜਾਂਦਾ ਜੇ ਆਤਮ ਅੰਤਰਾਤਮਾ ਨਾਲ ਸੰਗਤ ਕਰਨ ਲੱਗ ਜੇ ਅੰਤਰਾਤਮਾ ਦੀ ਆਵਾਜ਼ ਨਾਲ ਚੱਲਣ ਲੱਗ ਜੇ ਉਹ ਆਪ ਹੀ ਇੱਕ ਹੋ ਜਾਂਦਾ ਅੰਤਰਾਤਮਾ ਨਾਲ ਰੋਜ਼ ਗੱਲ ਤੇ ਆ ਜੋ ਦੇ ਅਨਸਾਰ ਹੋ ਗਏ ਕੋ ਗੇ ਜਦ ਆਪੇ ਖੋ ਜਾਂਦਾ ਹੈ ਇਹੀ ਤਾਂ ਦਰਸ਼ਨ ਆ ਆਪਣਾ ਹੀ ਆਤਮ ਦਰਸ਼ਨੇ ਕਰਨੋਂ ਜ਼ੋਰ ਕਿਹਦਾ 걸ਣਾ ਸੀ ਅੰਤਰ ਪ੍ਰਭ ਡੀਠਾ ਆਪਣਾ ਆਪ ਅੰਦਰ ਹੀ ਦੇਖ ਲਿਆ ਪੁਰ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਦਾ ਲਾਗਾ ਮਿੱਠਾ ਸੱਚ ਦੀ ਆਵਾਜ਼ ਜਿਹੜੀ ਸੋਚੀ ਆਪਣੇ ਆਪ ਆਉਂਦੀ ਹੈ ਨਾ ਉਹ ਪ੍ਰਭੂ ਅਸਲ ਚ ਜਿਹੜੀ ਆਪਣੇ ਆਪ ਗੱਲ ਕਰਨ ਲੱਗਦੀ ਹੈ ਨਾ ਆਪਣੇ ਆਪ ਅੰਦਰੋਂ बैठे बैठे पुरानी होता गई की बोल रहे हो तुम किससे खड़ा नटालावे जाईदा की पता किधरू गल चल जाए तो उठे बैठे थे पता लगदा कि संत संत अस्त्र प्रभु नीठा नाम रो का नाम दा बैठा तां कदे प्रभु दा नाम बैठा लगया दई मीठी गुरबानी लगदी होई जी जड़े सुनदे ने की करदे ਰੋਟਾ 2:00 ਵਜੇ ਤੇ ਉੱਠ ਕੇ ਇੰਨਾ ਕੁਛ ਕਰਦੇ ਨੇ ਆ ਤਾਂ ਕੁਝ ਹੋਰੇ ਲੱਗਿਆ ਪਿਆ ਕੀ ਕਰਦੇ ਸੀ ਕਿਸੇ ਨੂੰ ਮਿੱਠਾ ਲੱਗਿਆ ਜੇ ਮਿੱਠਾ ਲੱਗ ਜਾਂਦਾ ਤਾਂ ਬਦਲ ਜਲਦੀ ਦੁਦਿ ਹੋਉਂਦੀ ਸੰਤ ਸੰਗ ਅੰਤਰ ਪ੍ਰਮ ਇਹ ਤਾਂ ਕਦੇ ਨਾ ਪ੍ਰਭੂ ਕੋਲ ਲੱਗਾ ਮਿੱਠਾ ਬੜੇ ਦੋ ਪਾਜ ਨੂੰ ਲੱਗੇ ਦੋ ਬਿਠਾ ਜਦ ਬੰਤੀਰੂ ਦੋਵੇਂ ਦੋਲੂ ਲਗੇ ਤੇ ਕਹਿੰਦੇ ਸਾਨੂੰ ਤਾਂ ਲੱਗਿਆ ਮਿੱਠਾ ਬੇਦੂਰੇ ਆਏ ਕੰਵਲਿਆ ਉਸ ਬੂਦੇ ਰਹੇ ਆਪਣੀ ਆਤਮ ਕਥਾ ਦੱਸ ਕੇ ਸੰਜੀ ਲੋਕਾਂ ਨੂੰ ਬਗਲ ਕਰੂ ਜਿਹੜੇ ਉਸ ਵੇਲੇ ਸੀ ਨਾ ਪ੍ਰਭੂ ਕਾ ਲਗਾ ਮੇਰੀ ਬਿਮਾਰੀ ਕਿਉਂ ਦੂਰ ਹੋ ਗਈ ਹਾਂ ਉਹ ਦੱਸ ਰਹੇ ਜੀ ਉਹਨਾਂ ਦੇ ਹੋਈ ਨਹੀਂ ਖਾਨੀ सगले समग्री एकस घट माहे अनेक रंग नाना दिसता हे सगले है जो सारी रचना सारी सृष्टि है सारी सृष्टि सगले एकस घट माहे एकस घट अंतर आत एक, है। एक, है। एक है। अंतरा हो जाता ना सारा कुछ अंदर हो जाता पहला की होता ਪਹਿਲਾ ਤਨ ਤੇ ਭਵਨ ਮੈਂ रहा, ਉਹ ਜਿਹੜਾ ਹੈ ਤੈਨੂੰ ਭਵਨ ਸੁਭਾਇ ਰਹਿਣਾ ਬਾਰ-ਬਾਰ ਜਦ ਜਬ ਤੈਨੂੰ ਭਵਨ ਤਨ ਮੈਂ ਸਮਾਵਾਂ ਚਾ ਸકલ ਸੁਭੰਗਰੀ ਅੰਦਰੇ ਸਮਾ ਜਾਂਦੀ ਹੈ ਤਾਂ ਪਾਉ ਪਾਣ ਬ੍ਰੋ ਸੋਆ ਲੋ ਫਿਰ ਕੋ ਦਾ ਰਸੂਲੀ ਕੀ ਹੈ ਫਿਰ ਆਤਮ ਦਰਸ਼ਨ ਤੇ ਬਾ ਹੁਣ ਸਾਰੀ ਜਿੰਨੀ ਰਚਨਾ ਆਪਣੇ ਅੰਦਰ ਕੈ ਤਾਂ ਗਾਦਰ ਛੋਟਾ ਸੱਗ ਦਾ ਸਮਗ ਨਹੀਂ ਇੱਕ ਸ ਪੂਰਨ ਬ੍ਰਹਮ ਜਾਂ ਦੇ ਕੋ ਗਿਆ ਪੂਰਨ ਬ੍ਰਹਮ ਉਹਦੇ ਹਿਰਦੇ ਚ ਹੁੰਦੀ ਆ ਫਿਰ ਫਿਰਦਾ ਗੱਡਾ ਹੁੰਦਾ ਹਿਰਦਾ ਸੁਖ ਸਾਧ ਉਹ ਵੀ ਜੀ ਪਾਪ ਜਾਂਦਾ ਇਹ ਛੋਟਾ ਜਿਹਾ ਉਹ ਤਾਂ ਸਮਝੋ ਜੇ ਮੈਂ ਕਮਰੇ ਚ ਮੱਖੀ ਫਿਰਦੀ ਹੁੰਦੀ ਆ ਉੜਦੀ ਤਾਂ ਪਸੰਦ ਦਾ ਵਿੱਚ ਤੁਰਿਆ ਫਿਰਦਾ ਜਿਵੇਂ ਬਹੁਤ ਵੱਡੇ ਕਮਰੇ ਚ ਮੱਖੀ ਫਿਰਦੀ ਹੋਵੇ ਮਛਰ ਬਰਦਾ ਬਰੀ ਜਾਵੇ ਬਾਸਾ ਜਾਇ ਨਹੀਂ ਸਕਦਾ ਔਰ ਕਮਰਾ ਵੀ ਉਹਦੇ ਨੂੰ ਦੁਬਾਰਾ ਬੀਰ ਵਾਲ ਦੀ ਕਮਰਾ ਦਾ ਕਹੇਗਾ ਦੁਬਾਰਾ ਵਾਲ ਦੀ ਨਹੀਂ ਜਿੱਤੇ ਵੀ ਬਰਦੀ ਬਰੀ ਜਾਵੇ ਇੰਨੀ ਗਈ ਹੈ ਜਿੰਨਾ ਕੋ ਮਛਰ ਹੁੰਦਾ ਸਾਰੀ ਸ੍ਰਿਸ਼ਟੀ ਤੇ ਲੋਕ ਜਿਆਦਾ ਬੜੀ ਨਹੀਂ ਆ ਸਾਨੂੰ है ਲੱਗਦੀ ਸਾਰੇ ਸਮਗਰੀ ਇੱਕ ਇਕੱਠ ਮਾਹੇ ਅਨੇਕ ਰੰਗ ਨਾਨਾ ਦਿਸਟਾਏ ਅਨੇਕ ਰੰਗ ਨਾਨਾ ਦਿਸਟਾਏ ਅਨਕ ਪ੍ਰਕਾਰ ਦੇ ਰੰਗ ਨਾਨਾ ਦਿਸਟਾਏ ਜਿੱਦੈ ਦੁਨੀਆਂ ਦੇ ਗਿਆਨ ਦੇ ਜਿੱਦੈ ਸ੍ਰਿਸ਼ਟੀ ਜਿਹੜੇ ਗਿਆਨ ਨਾਲ ਸ੍ਰਿਸ਼ਟੀ ਜਦ ਹਰ ਦਾ ਰੰਗ ਹੈ ਜਦ ਸੱਚ ਦਾ ਰੰਗ ਹੈ ਉਹਦੇ ਚ ਨੌਰੀ ਲੱਗਦੇ ਨੇ ਹਰ ਆਪੇ ਹੀ ਇੱਕ ਰੰਗ ਹੈ ਆਪਣਾ ਕਲੰਗ ਦੇਖ ਲਿਆ ਕਲੰਗ ਦਾ ਡੱਬਾ ਖੋਲ੍ਹ ਲਿਆ ਸਾਰੇ ਉਹਦੇ ਆਪੇ ਕੋ ਰੰਗ ਹੀ ਇੱਕ ਪਾਸੇ ਕਲੰਗ ਦਾ ਦੁਆ ਪਾਸਾ ਫੜਦੇ ਬਹੁ ਰੰਗ ਹੀ ਇੱਕ ਪਾਸੇ ਕਲੰਗ ਦਾ ਦੁਆ ਪਾਸਾ ਫੜਦੇ ਬਹੁ ਰੰਗ ਹੀ ਹਰ ਆਪੇ ਹੀ ਇੱਕ ਅਪੇ ਵਰੰਗੀ ਬੋਰੰਗੀ ਵੀ ਤਾਂ ਉਹ ਹੀ ਸੀ ਉਹ ਸਾਰੇ ਰੰਗ ਇਸ ਤੋਂ ਬਾਦ ਹੋ ਗਏ ਜਦ ਇੱਕ ਆ ਗਿਆ ਹੱਥ ਜਦ ਇੱਕਾ ਹੋ ਗਿਆ ਦਰਸ਼ਨ ਮਾਇਆਲੇ ਪਾਸੇ ਬੋਰੰਗੀ ਹੈ ਦੂਰੇ ਪਾਸੇ ਫਿਰੰਗ ਦਾ ਸੱਚਾਲੇ ਪਾਸੇ ਤੇ ਨੰਤਾ ਝੂਠ ਵਾਲੇ ਪਾਸੇ ਬੋਰੰਗੀ ਦੀ ਹਾਂ ਨੌਨੇ ਪ੍ਰਭ ਦਾ ਨਾਮ ਦੇਹੀ ਵੇ ਇਸ ਹੁਣ ਨੌਨੇ ਤੇ ਪ੍ਰਭ ਦਾ ਨਾਮ ਨਾ ਉਹਨੇ ਨੂੰ ਨਾ ਇਹਨਾਂ ਨੇ ਨੋਖਜਾਨੇ ਬਣਾ ਲਏ ਉਹ ਤਾਂ ਮਾਇਆ ਦੇ ਨੇ ਨਾ ਬੰਦੇ ਲਗਦਾ ਹੈ ਨੋਨੇ ਦਾ ਨਮਾ ਗਿਆਨ ਦੋ ਦੁਨੀਆ ਤੇ ਯਾ ਨਹੀਂ ਹੈ ਐਸ ਵਕਤ ਵੀ ਨਹੀਂ ਹੈ ਕੋਈ ਤਕਾਦ ਲਗਾਉ ਸਕੀ ਹੋਈ ਉਹਦੀ ਵਿਆਖਾ ਦਿਖਾਓ ਕਿੱਥੇ ਇਹ ਨਾ ਨੇ ਦਈਏ ਨਮਾ ਨਮਾ ਗਿਆਨ ਆ ਜਾਂਦਾ ਹੈ ਪਰ ਸਾਥ ਨਹੀਂ ਹੁੰਦਾ ਹੈ ਜੇ ਹੈ ਉਹ ਗਿਆਨ ਹੈ ਬੇਕ ਉਹ ਜਿਹੜੇ ਬਹੁ ਰੰਗੀ ਸੀ ਬਹੁ ਰੰਗੀ ਉਹ ਹੋਰ ਨੇ ਦੁਨੀਆਬੀ ਗੱਲਾਂ ਨੇ ਦੁਨੀਆਬੀ ਗਿਆਨ ਨੇ ਇੱਕ ਰੰਗ ਦਾ ਜਿਹੜਾ ਨਾਮ ਦਾ ਸੱਚ ਦਾ ਇਹ ਤਾਂ ਜਦ ਪ੍ਰਗਟ ਕਦੇ ਹੀ ਪ੍ਰਗਟ ਹੁੰਦਾ ਹੈ ਹਮੇਸ਼ਾ ਹੀ ਰਹਿੰਦਾ ਹੁੰਦਾ ਇਹ ਕਿਰਕਾ ਹਮੇਸ਼ਾ ਹੀ ਰਹਿੰਦਾ ਹੁੰਦਾ ਦੌਨਦੀ ਜਪੜ ਤੇ ਨਾਮ ਦੇਹੀ ਤੇ ਅੰਦਰ ਹਿਲਦਾਇਆ ਉਹ ਅੰਤਰਾ ਆਤਮਾ ਦੀ ਆਵਾਜ਼ جیسا ਰੂਪ ਹੁੰਦੀ ਹੈ ਬਿਲਕੁਲ ਜਦੋਂ ਕੋ ਪੇੜ ਫੁੱਟਦਾ ਨਾ ਕਨਕਾ ਵੀਦਨੇ ਜਬ ਦੀਏ ਪੁਰ ਬੱਲੇ ਥੋੜੀ ਲੱਗੀ ਹੁੰਦੀ ਹੈ ਬੱਲੀ ਥੋੜੀ ਲੱਗੀ ਹੁੰਦੀ ਹੈ ਉਹਦਾ ਪਹਿਲਾ ਰੂਪ ਹੈ ਉਹ ਅੰਤਰਾਦੋਂ ਦੀ ਬਾਤ ਹੈ ਉਹ ਚੀਜ਼ ਪਹਿਲਾ ਰੂਪ ਹੈ ਉਸੇ ਨੂੰ ਫਲ ਲੱਗਣਾ ਹੈ ਜਾ ਕੇ ਲੱਗਦਾ ਉਹਨੂੰ ਫਲ ਤਾਂ ਇਹਨੂੰ ਸਜਾਵੇ ਜੇ ਨੂੰ ਪਾਲਾਂਗੇ ਜੇ ਨੂੰ ਵਧਾਵਾਂਗੇ ਤੇ ਫਲ ਫੜ ਦੇ ਦੂ ਉਹ ਉਹ ਅੰਤਰਾਦੋਂ ਦੀ ਬਾਤ ਪਹਿਲਾ ਰੂਪ ਹੈ ਫੜੋ ਸਨੂਰ ਕਰਨ ਫੜ ਲੱਕੂ ਦਾ ਬੰਦੇ ਤੇ ਹਾਂਜੀ ਦੇਹੀ ਵਿੱਚ ਇਸ ਦਾ ਬਿਸਰਾ ਦੇਹੀ ਵਿੱਚ ਕਾ ਜੇ ਸਭ ਕੁਝ ਸਗਲ ਸਮਗ ਨਹੀਂ ਘਟ ਵਿੱਚ ਤਾਂ ਉੱਬਰ ਵੀ ਤਾਂ ਘਟ ਕੇ ਫਿਰ ਬਾਹਰ ਰਹਿ ਜਾਓ ਉੱਬਰ ਤਾਂ ਆਪ ਵੀ ਘਟ ਵਿੱਚ ਹੀ ਆ ਫਿਰ ਤੇਹੀ ਦੇ ਵਿੱਚ ਹੋ ਗਿਆ ਉਹ ਵੀ ਜਦ ਜਿਹਦਾ ਇੰਦਾ ਦੇਹੀ ਐਡੀ ਹੋਗੀ ਕਿ सगਲ ਸੁਬਗਰੀ ਤੇ ਕਸ ਘਟ ਦੇ ਇੱਕਦੇ ਹੀ ਹਿਰਦੇ ਚ ਆ ਗਈ ਹਿਰਦਾ ਘਟੇ ਆ ਸਦਾ ਦੇਹੀ ਹੋਈ ਆ ਹਿਰਦੇ ਚ ਸਾਰੀ ਸ੍ਰਿਸ਼ਟੀ ਆ ਗਈ ਤੇ ਜਿਹੜਾ ਨਾਮ ਸ੍ਰਿਸ਼ਟੀ ਤੋਂ ਛਡਾਉਣ ਵਾਲਾ ਉਹ ਵੀ ਤਾਂ ਦਵਾਈ ਵੀ ਤਾਂ ਵਿਚੇ ਆ ਗਈ ਦਾਨ ਦੇ ਅਵਰਤ ਪ੍ਰਵਕਾ ਨਾਮ ਦੇਹੀ ਵਿੱਚ ਦੇਹੀ ਹਿਰਦੇ ਚ ਬੜਾ ਉਡੀਕਣਾ ਹੋਣ ਉਹ ਵੀ ਵਿਚੇ ਆ ਗਿਆ ਅੰਦਰ ਜਿੱਥੇ ਦਵਾਈ ਆ ਉਹਦੇ ਨਾਲ ਹੀ ਬਿਮਾਰੀ ਦੇ ਨਾਲੇ ਦਵਾਈ ਇਕਦੇ ਫਰਕਾ ਥੋੜਾ ਜਿਹਾ ਬਿਮਾਰਾ ਦਵਾਈ ਦਾ ਫਰਕਾ ਨਾ ਦਵਾਈ ਖਾ ਲੂਗਾ ਰਾਮਾ ਜੀ ਹਾਂ ਜੀ ਸੁੱਨ ਸਮਾਦ ਅਨਹਤ ਤੈਨਾਵ ਕਹਿ ਨਾ ਜਾਈ ਫਰਕ ਹੈ ਦਵਾਈ ਦਾ ਅਰਬਰੀਜ਼ਾ ਕਿੰਨਾ ਫਰਕਾ ਜਿੱਥੇ ਕਹਿੰਦੇ ਮੰਨੈ ਚੁੱਪ ਕਰਕੇ ਬੈਠਣਾ ਜਿੱਤੇ ਮਨ ਜੋਪਾ ਕੀਤਾ ਬੈਠ ਗਿਆ ਨਾ ਗੌਂਗਲਾ ਮਾਰ ਕੇ ਉੱਥੋਂ ਹੀ ਆ ਨਾ ਨਾ ਪਰਖਟ ਰੋ ਆ ਸੱਚ ਮਾਨਾ ਮਾਨਾ ਜੀਜ ਨਹੀਂ ਖਤਮ ਹੋ ਗਏ ਪੇੜ ਪੈਦਾ ਕਰ ਦੋ ਜੀ ਛਿਲਕਾ ਬਾੜ ਜਾਣਾ ਬਾਕੀ ਪੇੜ ਬਣ ਜਾਣਾ ਆ ਸਰੀਰ ਆ ਜਿਹੜਾ ਛਿਲਕਾ ਇਹ ਰਹਿ ਜਾਣਾ ਅੰਦਰ ਪੇੜ ਬਣ ਜੂ ਸਰੀਰ ਤਾਂ ਛਿਲਕਾ ਹੀ ਆ ਸਿਰਕਾਰਹਿ ਜਾਣਾ ਪੱਤੀ ਪੇੜ ਬੜਨਾ ਜੋ ਬੀਜ ਹੈ ਬੀਜ ਦਾ ਹੀ ਪੇੜ ਬੜਨਾ ਆਤਮਾ ਦਾ ਹੀ ਪੇੜ ਬੜਨਾ ਆਤਮਾ ਨੇ ਜੱਬੜ ਰਦੋ ਸਰੀਰ ਥੋੜੀ ਜਿਹਾ ਬਣ ਨੇ ਯੰਮ ਦਾ ਪ੍ਰਮਾ ਦਾ ਨਾਮ ਦੇਈਂ ਮੈਂ ਇਸ ਕਾ ਬਿਸਰਾਉਂ ਸਮਾਜ ਜਿੱਥੇ ਮਨ ਸੁਣ ਹੋ ਗਿਆ ਚੁੱਪ ਕਰ ਗਿਆ ਉੱਥੋਂ ਹੀ ਸ਼ਬਦ ਪੈਦਾ ਹੁੰਦੇ ਨੇ ਉੱਥੇ ਫਲਰਟ ਹੋਣਾ ਉੱਥੇ ਧਿਆਨ ਰੱਖਣਾ ਆਪਣੇ ਮਨ ਵਿੱਚ ਧਿਆਨ ਰੱਖਣਾ ਆਪਣੇ ਮਨ ਵਿੱਚ ਧਿਆਨ ਹੀ ਮਨ ਵਿੱਚ ਹੀ ਮਨ ਹੈ ਉਹ ਰੂਪ ਤਾਂ ਹੁੰਦਾ ਸ਼ਬਦ ਕਿਉਂਕਿ ਪੂਰਨ ਬ੍ਰਹਮ ਦਾ ਰੂਪ ਸ਼ਬਦ ਜਿਹੜਾ ਸਾਡਾ ਜਿਹੜਾ ਜਿਹੜਾ ਸਾਡਾ ਇੱਛਾ ਸੀ ਨਾ ਕਲਪਨਾ ਉਹ ਵੰਦੀ ਸ਼ਕਲ ਸੀ ਸ਼ਕਲ ਹੂਰਤ ਹੋਈ ਸੀ ਬਦਲ ਲਹਿਰ ਤੋਂ ਜਿਹੜਾ ਸ਼ਬਦ ਹੋਊਗਾ ਜਦ ਪੂਰਨ ਬ੍ਰह्म ਹੋ ਗਿਆ ਇਹ ਜੋ ਜਿਹੜੀ ਲਹਿਰ ਪੈਦਾ ਹੋਗੀ ਉਹ ਪੈਦਾ ਹੋਊਗਾ ਜਿੱਤੇ ਪੂਰਨ ਬ੍ਰह्म ਨੇ ਉਹਨਾਂ ਚੋਂ ਇਹੋ ਲਹਿਰ ਹੁਕਮ ਪੈਦਾ ਹੋਇਆ ਜਦ ਇੱਕ ਹੋ ਕੇ ਬਹਿ ਜਾਊਗਾ ਇਹ ਤੋਂ ਉਹੀ ਹੁਕਮ ਪੈਦਾ ਹੋ ਜੋ ਹੁਕਮ ਹੈ ਉਹੀ ਪੈਦਾ ਹੋ ਜੋ ਅਸਲ ਹੁਕਮ ਹੈ ਇਹ ਜੋ ਪੈਦਾ ਹੋ ਲੋ ਅਸਲੋ ਕਿਉਂਕਿ ਬੀਜ ਵਿੱਚੋਂ ਸੇਮ ਚੀਜ਼ ਪੈਦਾ ਹੁੰਦੀ ਹੈ पूर्ण ब्रह्म जो कोई चीज पैदा होगी ये नहीं हो कि सर कोई पैदा हो गए कहता कोई सरो बीज लो कि कोई चीज पैदा होगी कोई ये एको को पेड़ दे दे दाणे ने सरों में कोई चीज सरों पैदा होगी कल टको जी पैदा होगी इस करके जड़ा ब्रह्म पूर्ण ब्रह्म ये जो, जो शब्द पैदा होगा नाल वो वही पैदा हो जो हुक्म है कि कोई के शब्द जो एको नाम हुक्म है वो सद्गुरु दिया बुझाए दियो वही पैदा होने दुया नहीं होती ਗੋਦਾ ਬੋਲਕਿਓ ਕਹਿਦਾ ਹੋਊਂਗਾ ਹਾਂ ਸੁਣੋ ਤੁਹਾਡਾ ਅਨਾਦ ਪੈਨਾਦ ਕਹਿ ਨਾ ਜਾਏ ਅਚਰਜ ਬਿਸਮਾਰ ਕਹਿ ਨਾ ਜਾਏ ਅਚਰਜ ਬਿਸਮਾਰ ਨਹੀਂ ਦੱਸਿਆ ਜਾ ਸਕਦਾ ਜੋ ਪੈਦਾ ਹੋਣਾ ਇੱਕ ਤਾਂ ਬਿਸਮਾਰ ਹੋ ਜਾਂਦਾ ਅਚਰਜ ਹੋ ਜਾਂਦਾ ਇਹ ਅਚਰਜ ਦੀ ਗੱਲ ਹੈ ਕਿ ਅੰਦਰ ਕਿਛੇ ਦੇ ਜਿਹੜੀ ਵੀ ਇਹਨੂੰ ਬਾਹਰ ਤੋਂ ਲਾ ਉਹ ਅੰਦਰੋਂ ਪਤਾ ਲੱਗ ਜਿਵੇਂ ਬੇਟਾ ਮੇਰੇ ਅੰਦਰ ਇੱਥੇ ਕੋ ਸੋਬਾ ਨਾ ਹੁੰਦਾ ਮੈਂ ਤਾਂ ਬਾਹਰੋਂ ਵਧ ਰਿਹਾ ਛੇੜੇ ਚੀਜ਼ ਨੂੰ ਦੱਸੀ ਗਈ ਸੀ ਕਿਹੜੇ ਅੰਦਰ ਹੈ ਸੋਬ ਉਹ ਬਾਹਰੋਂ ਦਾ ਸੀ ਇਹਨੂੰ ਜੋ ਨਿਕਲਿਆ ਆਵੇ ਤੇ ਅਚਾਰ ਹੋਰ ਕੀ ਹੋਊਗਾ ਬਿਸਮਾਦ ਬਿਸਮਾਦ ਵੱਡੀ ਗੱਲ ਰਹੀ ਹੈ ਕਿੰਨਾ ਡੇੜੇ ਚੀਜ਼ ਪਈ ਸਾਨੂੰ ਪਤਾ ਹੀ ਲੱਗਿਆ ਵੀ ਸਾਡੇ ਕੋਲ ਕਾਚ ਆ ਚੇਲੀ ਪਈਏ ਕਿਤੇ ਅਸੀਂ ਤੰਗੀ ਘਟਦੇ ਰਹੇ ਜੀਰੇ ਜਵਾਰਾ ਦਾ ਖਜ਼ਾਨਾ ਸਾਡੇ ਅੰਦਰੇ ਸੀ ਦੋ ਦੋ ਹੱਥ ਦੇ فاਸਲੇ ਤੇ ਦੱਬਿਆ ਹੋਇਆ ਸਾਨੂੰ ਪਤਾ ਹੀ ਨਹੀਂ ਗਰੀਬੀ ਦੇ ਵਿੱਚ ਅਸੀਂ ਦਾ ਭੁਗਤੀ ਹੈ ਕੁਬਾਲੀ ਭੁਗਤੇ ਰਹੇ ਨਰਪਤੇ ਇੱਕ ਸੰਗਸਨ ਸੋਇਆ ਸੁਪਨੇ ਭਿਆਪਖਾਰੀ ਖਜ਼ਾਨਾ ਅੰਦਰ ਲੱਭਿਆ ਹੋਇਆ ਸੁਪਨਾ ਆਇਆ ਹੈ ਭਖਾਰੀ ਬਣਿਆ ਫਿਰਦਾ ਪਤਾ ਹੀ ਨਹੀਂ ਅੰਦਰ ਖਜ਼ਾਨਾ ਦੋ ਜਦ ਪਿਓ ਦਾਦਾ ਖੋਲ ਦਿੱਤਾ ਖਜ਼ਾਨਾ ਤਾਂ ਪਤਾ ਲੱਗ ਗਿਆ ਖਜ਼ਾਨੇ ਦਾ ਖਜ਼ਾਨਾ ਖੋਲ ਲਿਆ ਮੋਜੇ ਮੋਟੇ ਹੋ ਗਏ ਫਿਰ ਕੀ ਦੇਈ ਸੀ ਗਿਆਨ ਸਰਫ ਇਸ ਖਜ਼ਾਨੇ ਦਾ ਖਜ਼ਾਨਾ ਬੜ ਗਿਆ ਨਾ ਨੇ ਦੀ ਅਬਰ ਪ੍ਰਮਖ ਦੇਹੀ ਅੰਦਰ ਖਜ਼ਾਨਾ ਹੋ ਇਸ ਵਿਸਰਾਮ ਕਿੱਥੇ ਹੈ ਖਜ਼ਾਨਾ ਕਿੱਥੋਂ ਮਿਲੂਗਾ ਉਹਦਾ ਦੇਪਤਾ ਕਿੱਡੀ ਹੈ ਲੋਕ ਤਾਂ ਉਹਦੇ ਹੀ ਦਿਸੇ ਲਈ ਦਾ ਸਾਰਾ ਸੰਸਾਰ ਦੇਹੀ ਚ ਐਟੀ ਦੇਹੀ ਕਿੱਥੇ ਢੋਲੋਗੇ ਕਿੱਥੇ ਢੋਲੋਗੇ ਜਾਂ ਸਾਡੇ ਨੂੰ ਬਗ ਨਹੀਂ ਦੇ ਵਿੱਚ ਹੈ ਢੱਡ ਕੇ ਖਜਾਨੇ ਕਿੱਥੇ ਢੋਲੋਗੇ 2000 ਕਿਲੋਮੀਟਰ ਦਾ ਕੈਦਾ ਮਹਿਲ ਹੋਵੇ ਖਜ਼ਾਨਾ ਤੇਰੇ ਮੈਂ ਜਲ ਵੀ ਹੋ ਤੇ ਜੇ ਤੋਂ ਪੜ ਲੋ ਗਦੇ ਉਹ ਤੋਂ ਪੜ ਲੋ ਕਿ ਤੇ ਤੋਂ ਪੜ ਲੋ ਇਹ ਸਭ ਕਰੋਨਾ 400 ਮੀਟਰ ਦਾ ਵੀ ਨਹੀਂ ਪਤਾ ਕਿੱਥੇ ਇਹਦੇ ਨਹੀਂ ਲੱਭੋਂ ਕਿੱਥੇ ਸੁਬੂਦਰ ਜਿੱਤ ਨਹੀਂ ਮਾਰੀ ਹੈ ਵੀ ਸੁਬੂਦਰ ਕਿਹ ਜਾਣਾ ਲੱਭ ਲੋ ਕੋ ਮਸ਼ਾਲੀ ਹੈ ਜਿੱਥੇ ਤੁਹਾਡਾ ਮਨ ਬੈਠਾ ਚੁੱਪ ਕੀਤਾ ਹੋਇਆ ਉਹਦੇ ਥੱਲੇ ਖਜਾਨਾ ਹਾਂ ਉਹਦੇ ਵਿੱਚ ਖਜਾਨਾ ਅਧਨ ਬੁੱਧੇ ਵਿੱਚ ਖਜਾਨਾ ਹੋ ਰਿਹਾ ਮੰਨਿਆ ਬਾਰਵੇਂ ਆਪ ਸੁਨ ਅਸਮਾਦ ਅਨਰ ਚਹਿ ਤਹਿਨਾਦ ਆ ਉੱਥੇ ਆ ਜਿੱਥੇ ਮਨ ਚੁੱਪ ਕੀਤਾ ਹੋਇਆ ਹੈ ਪਰ ਜਦ ਤਣਾ ਬੋਲਣਾ ਇਹ ਜਦੋਂ ਮਰਦਾ ਬੋਲਿਆ ਨੇ ਕਫਨ ਪਾੜਦਿਆਂ ਸਰੀਰ ਦਾ ਕੱਪੜਾ ਉੱਧਰ ਹੀ ਪਾੜ ਦਿੰਦਾ ਕੱਪੜਾ ਇਹਦੇ ਤੇ ਕਪੜਾ ਇਹਨੇ ਪਾੜ ਦਣਾ ਇਹ ਮੁਰਦਾ ਕੱਪੜਾ ਪਾ ਦਵੇ ਦੁਆਰਾ ਦੀ ਹੁੰਦਾ ਇਹਦੇ ਦੁਆਰਾ ਮਲਦਾ ਚੱਕੋ ਆਪਣਾ ਕੱਪੜਾ ਲੈ ਜਾ ਮਾਂ ਦੀ ਬਦੌਲ ਦੁਆਰਾ ਮੁਰਦਾ ਬੋਲੇ ਕੱਪੜਾ ਪਾੜੇ ਕਿਹਾ ਇਹ ਕੱਪੜਾ ਪਾੜੇ ਇਹਦਾ ਕੱਪੜਾ ਆਪੇ ਪਾੜ ਦਿੰਦਾ ਲੈ ਜਾਓ ਆਪਣਾ ਚੱਕ ਕੇ ਕੱਪੜਾ ਵੀ ਲੋੜ ਹੈ ਦੀ ਆਪਣਾ ਕੋ ਭੰਦੇ ਦਿੱਤੀ ਜੋ ਸੁਨਸਮਾਦ ਅਹਲਦ ਤੈਨਾਦ ਅਨੰਤਨਾਦ ਕਹੇ ਨਾ ਜਾਈ ਅਚਰਜ ਬਸਤਿ ਬਾਈ ਜਾਨ ਕੀ ਦਸੀਏ ਤੁਸੀਂ ਕਹੇ ਗਈ ਕੀ ਦਸੀਏ ਇਹਦੇ ਬਾਰੇ ਹੋਰ ਬਸਮਾਦ ਹੋ ਜੂਗਾ ਜਦੋਂ ਹੋਗੀ ਗੱਲ ਸਹੀ ਗੱਲ ਹੈ ਜਿੱਦਣਾ ਕੱਟਣਾ ਵਾਪਰ ਗਈ ਉਹ ਜਾਣੇ ਅਰੋੜਾ ਰਾਮ ਜਾਣੇ ਉਹੀ ਜਾਣੇ ਆ ਉਹਦਾ ਰਾਮ ਜਾਣੇ ਇਦੋ ਹੋਰ ਕੰਮ ਕੁਛ ਨਹੀਂ ਕਰ ਸਕਦੇ ਹੋ ਓਡੀ ਕੋ ਦੱਸਿਆ ਜਾ ਸਕਦਾ ਹੈ ਜੇ ਬਾਰੇ ਆਪੇ ਪਤਾ ਲੱਗ ਜੂ ਜੀਦਣਾ ਘਟਣਾ ਬਾਪੂ ਆਪੇ ਪਤਾ ਲੱਗ ਜੂ ਤਿਨੀ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਚੀ ਪਾਏ ਹਾਂ ਜੀ ਦੇਖਿਆ ਤਿਨੇ ਤਿਨੀ ਦੇਖੇ ਸਾਫ ਤਾਏ ਇਹ ਦੇਖਿਆ ਕਿਦਾਂ ਆ ਜਿਹਦਾ ਦੱਸ ਪੇਟ ਜਾਇਆ ਉਹਨੂੰ ਪਤਾ ਦੱਸ ਕੀ ਹੁੰਦਾ ਜਿਹਦੇ ਹੋਇਆ ਨਹੀਂ ਕਦੇ ਉਹਨੂੰ ਵੀ ਪਤਾ ਪੇਟ ਦਾ ਦੱਸ ਜਿਹਦੇ ਅੱਖਾਂ ਦੀ ਕਦੇ ਉਹਨੂੰ ਵੀ ਪਤਾ ਅੱਖਾਂ ਕੀ ਹੁੰਦਾ ਜੇ ਤੇਰਾ ਖਾਦ ਦੁਖਣੀ ਹੋਇਆ ਤਾ ਪਤਾ ਗੂਰ ਉਹਦੀਆਂ ਅੱਖਾਂ ਕਦੇ ਦੁਖੀ ਹੋਈ ਨਹੀਂ ਉਹਨੂੰ ਪਤਾ ਹੀ ਨਹੀਂ ਅੱਖਾਂ ਦਾ ਦੁੱਖ ਦਾ ਕੀ ਫਿਰ ਉਹ ਕਹਿੰਦਾ ਵੀ ਅੱਖਾਂ ਦਾ ਦੁੱਖ ਸਭ ਤੋਂ ਪਹਿਲਾਂ ਵੀ ਹੋਰ ਕੁਝ ਹੋ ਜਵੇ ਅੱਖਾਂ ਦਾ ਮਸਲ ਮਾਰ ਦਾਨ ਕਿੱਥੇ ਜਾਂ ਸੋਝੀ ਪਾਏ ਉਹਨੂੰ ਕਹਿੰਦੇ ਸੋਝੀ ਆਉਣੀ ਹੈ ਜੇ ਦੇਖ ਲੈਂਦਾ ਉਹ ਮੰਨ ਲੈਂਦਾ ਜੇ ਉਹ ਚੰਗੀ ਦੇਖਦਾ ਉਹ ਬੰਦਾ ਹੀ ਬੰਦੇ ਕੀ ਦੇਖੇ ਦੇ ਮੰਨੋ